ਹਾਂਜੀ ਭਗਤ ਕਬੀਰ ਜੀ ਵੱਲੋਂ 18ਵੀਂ ਪੌੜੀ ਵਿੱਚ ਠੱਠੇ ਅਖਰ ਦਾ ਉਪਦੇਸ਼ ਹੈ ਜੀ ਹਾਂ ਠੱਠਾ ਇਹ ਹੈ ਦੂਰ ਠੱਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਹਾਂ ਠੱਠਾ ਇਹ ਹੈ ਦੂਰ ਠੱਗ ਧੀਰਾ ਆ ਠੱਗ ਧੀਰਾ ਨਾ ਠੱਗ ਠੱਗ ਪੂਰੀ ਖਾਈ ਵੀ ਕਹਿੰਦੇ ਨੇ ਠੱਗ ਪੂਰੀ ਵਾਇਆ ਇਹ ਦੂਰ ਠੱਗ ਨੀਰਾ ਰਾਹ ਜਿਹੜੇ ਠੱਗ ਦੀ ਰਾਹ ਹੈ ਜੋ ਹੈ ਮਾਇਆ ਇਹ ਸਾਰਾ ਠੱਗ ਦੀ ਰਾਹ ਜਿਹੜਾ ਪਾਣੀ ਦਾ ਬੁਲਬੁਲਾ ਸਰੀਰ ਠੱਗ ਦੀ ਰਾਹ ਦੂਰ ਹੈ ਤਾਂ ਅਲਾ ਕਰ ਦੇ ਆਪਣੇ ਆਪ ਦੂਰ ਠੱਗ ਦੀ ਰਾਹ ਨੀਠ ਮਨ ਕੀਆ ਧੀਰਾ ਜੀੜ ਹੁੰਦਾ ਨਾਲ ਬਹੁਤ ਔਖਾ ਉਹ ਡੀਟ ਲਫ਼ਜ਼ ਬੋਲਦੇ ਨੇ ਯੂਪੀ ਤੇ ਡੀਟ ਵੈਸੇ ਲੱਗਦਾ ਹੈ ਗੁਰਬਾਣੀ ਉਲੀਠ ਨੂੰ ਡੀਟ ਕਹਿੰਦੇ ਹੁਣ ਇਹਨੂੰ ਡੀਟ ਨੀਟ ਬੜਾ ਔਖਾ ਮੁਸ਼ਕਲ ਨਾਲ ਮੰਨੂ ਤਿਰ ਕੀਤਾ ਬਹੁਤ ਫਾਸਟ ਚੱਲਦਾ ਸੀ ਉਹ ਤਾਂ ਸੀ ਇਹਦੀ ਸਪੀਡ ਸਲੋ ਬੜੀ ਔਖੀ ਕੀਤੀ ਹੌਲੀ ਹੌਲੀ ਬ੍ਰੇਕ ਲਾ ਕੀਤੀ ਅਚਾ ਇਹ ਕਹਿੰਦਾ ਭਾਵਾ ਕਿ ਇਹ ਜਿਹੜਾ ਨੀਰਾ ਏ ਤੋਂ ਨਾ ਸਿਹਾਰੀਆ ਦੂਰ ਤੇ ਇਹ ਤੋਂ ਦੂਰੀ ਬਣਾ ਕੇ ਰੱਖੋ ਹਾਂ ਜੀ। ਨਹੀਂ ਤਾਂ ਦੂਰੀ ਬਣਾ ਕੇ ਰੱਖੋ। ਉਹ ਘਟਾ ਲੈ ਘਟਾਉਂਦਾ ਆ ਹੁੰਦੀ ਹੈ। ਜੀ। ਜਿਨੀ ਠੱਗ ਠੱਗਿਆ ਸਗਲ ਜਗ ਖਾਵਾ ਸੋ ਠੱਗ ਠੱਗਿਆਂ ਠੌਰ ਮਨ ਆਵਾ। ਜਿਹੜੇ ਠੱਗ ਨੇ ਠੱਗ ਕੇ ਸਾਰਾ ਸੰਸਾਰ ਖਾ ਲਿਆ। ਉਹ ਠੱਗ ਨੂੰ ਠੱਗਿਆ ਸੀ। ਮਨ ਇਸ ਥਾਂ ਨਹੀਂ ਆਊਗਾ। ਇਹ ਮਾਇਆ ਜਿਹੜੀ ਹੈਗੀ ਐ ਆ ਮੁਸਮਸਲਾ ਬੇਹਾਟ। ਇਹ ਮਾਇਆ ਨੇ ਸਾਰਾ ਜੱਗ ਠੱਗਿਆ ਹੋਇਆ ਜੋ ਇਸ ਦੀ ਸੇਵਾ ਕਰੇ ਤੁਸੀਂ ਕੋ ਫਿਰ ਖਾਏ। ਇਹਨੂੰ ਠੱਗਿਆ ਹੀ ਜਿਹੜਾ ਹੈ ਮੰਟਾ ਰਹਾਊਗਾ ਉਹ ਟਿਕਾਣੇ ਆਊਗਾ। ਮਾਇਆ ਦੀ ਟਿਹੋਰੀ 'ਚ ਆਪ ਫਸਣਾ। ਮਾਇਆ ਤੋਂ ਕੰਮ ਲੈ ਜਾਣਾ, ਇਹਨੂੰ ਕੰਮ ਦੇਣਾ ਨਹੀਂ। ਮਾਇਆ ਨੂੰ ਆਪਣੇ ਅਨਸਾਰ ਵਰਤਣਾ ਹੈ ਮਾਇਆ ਦੇ ਰਸਾਲ ਨਿਮਾਇਆ ਦੇ ਪਿੱਛੇ ਤਿਆਗ ਦੇ ਠੱਗੀ ਠਗਿਆ ਸਗਲ ਜਗ ਖਾਵਾ ਸੋ ਠੱਗ ਠਗਿਆ othor mann aava ਆ ਬੰਨ ਫੇ ਚੜ ਜਾਂਦਾ othor ਆ ਜਾਂਦਾ ਇਹ ਗੁਰਮੁਖ ਦਾ ਟੀਚਾ ਹੈ ਜੀ ਹਾਂ ਗੁਰਮੁਖੀ ਪੰਥਰਾ ਹੈ ਵੇ ਆਵਰੇ ਠੱਗੀ ਚਾਉਣਾ ਠੱਗਣ ਵਾਲੇ ਨੂੰ ਢੱਕ ਲੈਣਾ ਹਾਂ ਇਹ ਗੁਰਸਿੱਖੀ ਦੀ ਡੈਫੀਨੇਸ਼ਨ ਹੈ ਜੀ ਆਹ ਪੰਤਰਾ ਕਹ ਲੋ ਡੈਫੀਨੇਸ਼ਨ ਕਹ ਲੋ ਆ ਨਾ ਵਾਲਾ ਹੁੰਦਾ ਆਪਣਾ ਜਿਹੜਾ ਆਪ ਨੂੰ ਠੱਗਦਾ ਆ ਬਹੁਤੋਂ ਭੱਜਣਾ ਵੀ ਨਹੀਂ ਮਾਇਆ ਤੋਂ ਭੱਜ ਗਏ ਨਾ ਜੋਗੀ ਭੱਜਣਾ ਹੈ ਨਹੀਂ ਠੱਗੀ ਚਾਉਣਾ ਨਹੀਂ ਪਾਣੀ ਠੱਗੀ ਲਾ ਕੇ ਜਾਣੀ ਆ ਸੀ ਆਪਾਂ ਵਰਤੀ ਵਾਲਾ ਉਹਦੀ ਗੱਲ ਬਣਨੀ ਇਹ ਤਾਂ ਕੰਮ ਤਾਂ ਲੈਣੀ ਆ ਹੁਣ ਹਾਂਜੀ ਠੀਕ ਐ ਵੀ ਇਹ ਸਾਨੂੰ ਨਾ ਠੱਗ ਜਵੇ ਅਸੀਂ ਇਹਨੂੰ ਠੱਗ ਕੇ ਜਾਣਾ ਇਹ ਸਾਨੂੰ ਨਾ ਰੱਖ ਲਵੇ ਕੇ ਨਾ ਰੱਖ ਲਵੇ ਅਸੀਂ ਆਪਣੇ ਘਰ ਚਲੇ ਜਾਣਾ ਇਹਨੂੰ ਛੱਡ ਜਣਾ ਕੰਮ ਇੱਥੇ ਲੈ ਲੈਣੇ ਇਹ ਕਿਉਂ ਮੈਨੂੰ ਤਾਂ ਹੋਰ ਹੀ ਜਿੰਨਾ ਚਿਰ ਮੈਂ ਕਮਨਦਰ ਦਾ ਬੜਾ ਫ੍ਰੇਮ ਕਰਦੇ ਤੇ ਹੁਣ ਪੁੱਛਦੇ ਹੀ ਨਹੀਂ ਠੀਕ ਐ ਜੀ ਉਹਨਾ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਜੀ ਆਸਾ ਮਹੱਲਾ ਪਹਿਲਾ ਵੱਟੀ ਚੋਂ ਠਠੇ ਠਾਂਡ ਵਰਤੀ ਤਿਨ ਅੰਤਰ ਹਰ ਚਰਣੀ ਜਿਨ ਚਿਤ ਲਾਗਾ ਹਾਂ ਹਰ ਕਿਹੜੀ ਜਿਨ ਚਿਤ ਵਰਤ ਜਾਂਦੀ ਹੈ ਉਹਨਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ ਜਿਨ੍ਹਾਂ ਹਰ ਚਰਨ ਦੇ ਨਾਲ ਜਿਨ੍ਹਾਂ ਦੇ ਚਿਤ ਜੁੜ ਜਾਂਦੇ ਚਿਤ ਲਾਗਾ ਸੇਈ ਜਨ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ ਉਹ ਜਨ ਸਮਝ ਲੋ ਨਿੱਕੇ ਤਾ ਉਹਨਾਂ ਦਾ ਲੋ ਬਈ ਤਾਰ ਕੇ ਬਿਸਰੇ ਛਕ ਜਿਉ ਧਰਮ ਸਾਗਰ ਜਿਹੜਾ ਕਰ ਕੇ ਬਾਹਰ ਚਲੇ ਗਏ ਪਰਮਤੋ ਪਰਮ ਦਾ ਸੁਖ ਪਾਇਆ ਹਾਂ ਉਹਨਾਂ ਨੇ ਗੁਰਪ੍ਰਸਾਦ ਨਾਲ ਸੁਖ ਪ੍ਰਾਪਤ ਹੋ ਗਿਆ ਉਹਨਾਂ ਨੂੰ ਆਂਛਾ ਇੱਥੇ ਗੁਰਪ੍ਰਸਾਦ ਦੀ ਜਗ ਤੋ ਪ੍ਰਸਾਦੀ ਲਿਖਤਾ ਹਾਂ ਆਤੋ ਪ੍ਰਸਾਦ ਗੁਰਪ੍ਰਸਾਦ ਕੋਈ ਗੱਲ ਹੈ ਇਹ ਸੀਗਾ ਜੀ ਗੁਰਨਾਥ ਸਾਹਿਬ ਦਾ 15ਵੇਂ ਪੌੜੀ ਚੋਂ ਉਪਦੇਸ਼ ਗੁਰਮਦਾਸ ਜੀ ਦਾ ਕੋਈ ਉਪਦੇਸ਼ ਨਹੀਂ ਹੁਣ ਮਹੱਲਾ ਪੰਜਵਾਂ ਪੌੜੀ ਨੰਬਰ 28 ਚੋਂ ਉਪਦੇਸ਼ ਹੈ ਜੀ ਠੱਠੇ ਅੱਖਰ ਤੋਂ ਪੌੜੀ ਠੱਠਾ ਮਨੂਆ ਠਾਹੇ ਜੋ ਸਗਲ ਤਿਆਗ ਇਕੈ ਲਪਟਾਂਹੀਂ ਠੱਗਾ ਮਨੂਆ ਠਾਹ ਨਹੀਂ ਉਹਨਾਂ ਦਾ ਮੰਨਣਾ ਟੈਂਦਾ ਨਹੀਂ ਹੈ ਕਦੇ ਵੀ ਦਿਗਦਾ ਨਹੀਂ ਹੈ ਉਹਨਾਂ ਦਾ ਬਲ ਜੋ ਸੰਗਲ ਤਿਆਗ ਇੱਕ ਹੈ ਲਪਚਾ ਨਹੀਂ ਤੇ ਸਭ ਕੁਝ ਛੱਡ ਕੇ ਹੋ ਕੇ ਆਪਣੇ ਸਾਚੇ ਨਾਲ ਜੁੜ ਜਾਂਦੇ ਨੇ ਆਪਣੇ ਮੂਲ ਨਾਲ ਜੁੜ ਜਾਂਦੇ ਨੇ ਹੈ ਇਹ ਕੀ ਲਪਚਾ ਆਪਣੇ ਮੂਲ ਨਾਲ ਜੁੜ ਜਾਂਦੇ ਨੇ ਜਿਹੜੇ ਉਹਨਾਂ ਦਾ ਮਨ ਟਿਕਦਾ ਨਹੀਂ ਡੋਲਦਾ ਨਹੀਂ ਆਇਆ ਛੱਡਣ ਕਿਰੇ ਠੀਕ ਹੈ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਹਾਂ ਜੀ ਹਾਂ ਠਹਿਕ ਠਹਿਕ ਮਾਇਆ ਸੰਗ ਮੂਏ ਉਹ ਆਕੇ ਕੁਸਲ ਨਾ ਕਤੂ ਹੂਏ ਜਿਹੜੇ ਟਹਿਕਦੇ ਰਹਿੰਦੇ ਨੇ ਨਾਲ ਬਹਿਸ ਕਰਦੇ ਰਹਿੰਦੇ ਨੇ ਮਾਇਆ ਦੇ ਪਿੱਛੇ ਲੜਦੇ ਪਿੰਦੇ ਰਹਿੰਦੇ ਨੇ ਮਾਇਆ ਸੰਗ ਮੂਏ ਉਹ ਸਮਝੋ ਉਹਨਾਂ ਨੇ ਮਰ ਲਾਈਆਂ ਉਹ ਆਕੇ ਕੁਸਲ ਨਾ ਕਤੂ ਹੂਏ ਉਹਨਾਂ ਦੇ ਘਰ ਕਦੋਂ ਸੁਖ ਹੋਵੇ ਵੀ ਕੁਸ਼ਲਤਾ ਨਹੀਂ ਉਹਨਾਂ ਦੇ ਰਹਿਣੀ ਉਹਨਾਂ ਨੇ ਮਰ ਨਹੀਂ ਮਰਨਾ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ ਠਾਂਡ ਪਰੀ ਸੰਤਹਿ ਸੰਗੀ ਵਸਿਆ ਅੰਮ੍ਰਿਤ ਨਾਮ ਤਹਾਂ ਜੀਆ ਰਸਿਆ ਠਾਂਡ ਭਰੀ ਠੰਡ ਪੈ ਜਾਂਦੀ ਸੀ ਉਹਨਾਂ ਦੇ ਅੰਦਰ ਸਤਹਿ ਸੰਗ ਵਸਿਆ ਜਦੋਂ ਮਨ ਆਪਣੇ ਮੂਰ ਦੇ ਨਾਲ ਜੁੜ ਕੇ ਅੰਦਰ ਵਸ ਜਾਣ ਟਿਕ ਜਾਂਦਾ ਤਾਂ ਠੰਡ ਪੈ ਜਾਂਦੀ ਹੈ ਅੰਮ੍ਰਿਤ ਨਾਮ ਤਹਾਂ ਜੀਆ ਰਸਿਆ ਉੱਤੇ ਜੀ ਅੰਮ੍ਰਿਤ ਨਾਮ ਦੀ ਉੱਤੇ ਉਹਨੂੰ ਰਸ ਆਉਂਦਾ। ਉਦੋਂ ਆਪਣੇ ਮੂਲ ਤੋਂ ਜੋ ਰਸ ਆਉਂਦਾ ਹੈ, ਉਹੀ ਅੰਮ੍ਰਿਤ ਨਾਮ ਦਾ ਰਸ ਹੈ। ਉਹੀ ਨਾਮ ਦਾ ਰਸ ਹੈ ਜਿਹੜਾ ਮੂਲ ਤੋਂ ਆਉਂਦਾ ਹੈ। ਉਹਦੇ ਵਿੱਚ ਜੀਵਨ ਜੀਵਨ। ਹਾਂ ਠਾਕੁਰ ਆਪਣੇ ਜੋ ਜਨ ਭਾਇਆ ਨਾਨਕ ਪੂਆ ਕਾ ਮਨ ਲਾਇਆ। ਠਾਕੁਰ ਆਪਣੀ ਜੋ ਜਨ ਭਾਇਆ ਜਿਹੜਾ ਆਪਣੇ ਠਾਕੁਰ ਨੂੰ ਪਾ ਗਿਆ ਜਨ ਜਾਣ ਹੁੰਦਾ ਜਾਣਕਾਰੀ ਜਿਹੜਾ ਗਿਆਨ ਉਹਦੇ ਮੂਲ ਨੂੰ ਠੀਕ ਲੱਗ ਗਿਆ ਭਾ ਗਿਆ ਜਾਣਕਾਰੀ ਜਿਹੜੀ ਹੈ ਸਾਡੇ ਕੋਲ ਜਿਹੜੀ ਤੁਸੀਂ ਗਿਆਨ ਹੁੰਦਾ ਉਹ ਗਿਆਨ ਸਹੀ ਹੈ ਜਿਹੜਾ ਸਾਡੇ ਠਾਕੁਰ ਨੂੰ ਸਾਡੇ ਮੂਲ ਨੂੰ ਚੰਗਾ ਲੱਗ ਜਵੇ ਹਾਂ ਇਹ ਗਿਆਨ ਠੀਕ ਹੈ ਪਾਇਆ ਜਾਣ ਨੂੰ ਕੋ ਠੀਕ ਲਾਇਆ ਇਹਨਾਂ ਦੇ ਉਹਨਾਂ ਦੇ ਵਕਤ ਕਰਨ ਬੈਠੀ ਹੈ ਹੋਰ ਕਿੰਨੀ ਗ੍ਰੰਥ ਫੜ ਲੋ ਠੰਡ ਨਹੀਂ ਫਿਰਦੀ ਗੁਰੂ ਦੇ ਵਿੱਚ ਨੂੰ ਉਹ ਗਿਆਨ ਪਉਦਾ ਜਿਹੜਾ ਉਹਨੇ ਦਿੱਥਿਆ ਹੋਵੇ ਸਾਨੂੰ ਜਿਹੜਾ ਉਹਨੇ ਕਰਾਇਆ ਹੋਵੇ ਗੁਰਬਾਣੀ ਸਤਕੁਰ ਦੀ ਬਣਦੀ ਹੈ ਗੁਰਬਾਨੀ ਹੈ ਇਹੀ ਗਿਆਨ ਉਹਦਾ ਗਿਆਨ ਹੈ ਉਪਦੇਸ਼ ਕਬੀਰ ਜੀ ਕਹਿੰਦੇ ਆ ਵੀ ਜੋ ਠਗਨੀਰਾ ਸ੍ਰਿਸ਼ਟੀ ਦੇ ਵਿੱਚ ਜੋ ਵੀ ਮਾਇਆ ਚੋਂ ਪੈਦਾ ਹੋਇਆ ਆਪਾਂ ਉਹ ਤੋਂ ਬਚ ਕੇ ਰਹਿਣਾ ਉਹਦੇ ਨਾਲ ਮਨ ਨਹੀਂ ਲਾਉਣਾ ਹੈ ਜੀ ਜੀ ਤੇ ਜਿਹੜੇ ਬਚ ਕੇ ਮਾਇਆ ਤੋਂ ਅਸਲ 'ਚ ਓ ਠੱਗ ਨੂੰ ਠੱਗੀ ਲਾ ਕੇ ਗਏ ਤੇ ਜੀ ਤੇ ਗੁਰਨਾਣਕ ਸਾਹਿਬ ਦਾ ਉਪਦੇਸ਼ ਇਹ ਹੈ ਵੀ ਜਿਹੜੇ ਠੱਗੀ ਤੋਂ ਵੱਜ ਜਾਣਗੇ ਉਹਨਾਂ ਦੇ ਅੰਦਰ ਠੰਡ ਵਰਤ ਜੂਗੀ ਜੀ ਤੇ ਉਹ ਇਤੋਂ ਹੋ ਕੇ ਜਾਣਗੇ ਹਾਂ ਤੇ ਭੰਮੀ ਬਾਸ਼ਾ ਦਾ ਵੀ ਇਹੀ ਉਪਦੇਸ਼ ਹੈ ਕਿ ਠਾਣ ਪਰੀ ਸੰਤੈ ਸੰਗ ਬਸਿਆ ਠੰਡ ਪੈ ਜਾਈਗੀ ਅੰਦਰ ਨੇ ਆਪਾਂ ਆਪਣੇ ਮੂਲ ਨਾਲ ਜੁੜ ਜਾਾਂਗੇ ਹਾਂਜੀ ਬਿਲਕੁਲ ਠੀਕ ਹੈ ਜੀ ਹੁਣ ਆਪਾਂ ਅਗਲਾ ਅੱਖਰ ਕਰਦੇ ਹਾਂ ਜੀ